एको एक कह सब कोई हम में गर्भ व्यापै अंतर बाहर एक पहचान एक है एको महल सि व्यापै ਕੋਈ एक कह को सब कोई सारीयां पत्ता माले एक कर कई बन्दे रे ਹਾਂ ਜਦ ਕੋਈ ਨਾਲ ਬਾਹਰ ਇੱਕ ਜਾਣ ਲੈਂਦਾ ਇੱਕ ਸਮਝ ਲੈਂਦਾ ਇੱਕ ਉਹ ਜਾਣ ਲੈਂਦਾ ਹੈ ਉਹ ਜਾਣ ਲੈਂਦਾ ਹਾਂਜੀ ਉਹ ਮਹਿਲ ਵੀ ਪਿੱਛੇ ਮਹਿਲ ਵੀ ਦੇਖ ਲੈਂਦਾ ਅੱਛਾ ਜੀ ਉਹ ਮਹਿਲ ਦੇ ਵੀ ਤ੍ਰਿੰਦਾ ਜੇ ਮਹਿਲ ਦੇ ਵੀ ਦੇਖ ਲਓ ਉੱਤਰ ਬਾਹਰ ਇੱਕ ਬਚੂੜੇ ਉੱਤਰ ਬਾਹਰ ਜਿਹੜਾ ਅੰਦਰ ਹੈ ਜਿਹੜਾ ਬਾਹਰ ਬੁੜੇ ਨੂੰ ਅੱਖੋਂ ਹੀ ਦੇਖਦਾ ਹੈ ਅੱਛਾ ਜੀ ਅਦੂਤ ਹੀ ਸੁਣਦਾ ਹੈ ਹੂੰ ਬੋਲਦਾ ਹੈ ਬਾਤਾਲ ਆਪ ਕਰਦਾ ਹੈ ਬੈਰ ਬਰੋਲ ਵੀ ਕਰਦਾ ਹੈ ਕੰਮ ਕਰੋਦ ਵੀ ਕਰਦਾ ਹੈ ਇਹ ਹਰ ਅੰਦਰ ਵਾਲਾ ਇਹਦਾ ਦੂਰ ਇਹ ਦੋਏ ਕਨੂਨ ਇਹਨਾਂ ਦੋਹਾਂ ਨੂੰ ਇੱਕ ਕਰਕੇ ਪਛੰਦਣਾ ਦੋਏ ਪਿਜਾਦੋਂ ਜਦੋਂ ਜਬਾਹਲਾ ਉਗਣ ਛੜਦਾ ਹੈ ਉਦੋਂ ਲੈ ਵਰਤਨ ਹੋ ਜਾਂਦਾ ਹੈ ਗੁਣੀ ਦੇ ਨਾਲ ਅੱਛਾ ਜੀ ਫੇਰ ਜਿਹੜਾ ਨਾਂ ਜਾਂਦਾ ਫੇਰ ਇਹਦੀ ਹੁੰਦੀ ਆ ਵੀ ਖਕੀ ਆਤਮ ਤਾਸ਼ਿਲ ਫੇਰ ਹੁੰਦਾ ਆਤਮ ਨੂੰ ਤੂੰ ਆਪੇ ਕਹਿ ਰੂਏ ਦੱਸਿਆ ਜਿੱਦਾਂ ਤੂੰ ਆਪੇ ਪਹੁੰਗਿਆ ਇਤਨਾ ਗਿਆਨ ਹੁਣਿਆ ਵਰਨਾ ਇੱਕ ਦਾ ਗਿਆਨ ਕਿਤੋਂ ਜੂੜੋ ਅੱਛਾ ਜੀ ਬਾਹਰੋਂ ਇੱਕ ਦਾ ਗਿਆਨ ਨਹੀਂ ਹੁੰਦਾ ਇੱਕ ਦਾ ਗਿਆਨ ਤੈਨੂੰ ਆਪਣਾ ਹੀ ਹੁੰਦਾ ਆਪਣੇ ਫਿਰ ਵੀ ਗਰਭ ਫਿਰ ਵੀ ਵਾਪਰੇ ਆ ਸਭ ਨੂੰ ਹੈ ਜੀ ਹੋਂ ਬੇਗਰਭ ਫਿਰ ਕਾਡੀ ਗੱਲ ਦਾ ਜੈਕਾ ਕੀ ਹੋਇਆ ਜਦ ਫਿਰ ਮੈਂ ਕੀ ਰਹਿ ਗਿਆ ਮਹ ਸਰ ਹੀ ਰਿਹਾ ਗਿਆ ਉਹ ਸਰ ਫਿਰ ਵੀ ਵਿਆਪੀ ਜਾਂਦਾ ਇੱਕ ਵੀ ਵਧੀ ਜਾਂਦਾ ਰਹੋ ਤੁਸੀਂ ਸਰ ਫਿਰ ਵੀ ਵਿਆਪੀ ਜਾਂਦਾ ਲੋਕਾਂ ਨੂੰ ਤੇ ਅੰਤਰ ਬਾਹਰ ਮਤਲਬ ਹਿਰਦੇ ਦੇ ਅੰਦਰ ਜਿਹੜਾ ਸਾਲ ਜਿਹੜਾ ਬਾਹਰ ਗਲਪ ਕਰਦਾ ਅਖੋਜੀ ਦੇ ਬਾਹਰ ਹੈ ਤੇ ਹਰ ਦੂਰ ਨਾ ਜਾਣੋ ਇੱਕੋ ਸ੍ਰੇਸ਼ਟ ਸਬਾਈ ਇੱਕੰਕਾਰ ਅਵਰ ਨਹੀ ਦੂਜਾ ਨਾਨਕ ਇੱਕ ਸਮਾਈ ਰੱਬ ਨੇੜੇ ਐ ਦੂਰ ਨਹੀਂ ਐ ਕਿਤੇ ਜਿਵੇਂ ਦੱਸਿਆ ਹੋਇਆ ਕੋਤਾਲੀ ਦਰੀਆ ਉਹ ਜਾਊਗਾ ਪਤਾ ਕਿੱਲੇ ਮੀਲਾਂ ਦੇ ਪਹਾੜ ਦੇ ਦੱਸਿਆ ਇਤਾਲ ਜੰਤਾ ਰੱਬ ਨੇੜੇ ਐ ਉੱਧਰ ਹੂੰ ਹੂੰ ਆਹ ਦੂਰ ਨਾ ਜਾਣਾ ਉਹਨੂੰ ਦੂਰ ਨਹੀਂ ਕਰਨਾ ਚਾਹੀਦਾ ਉੱਧਰ ਐ ਉਹ ਠੀਕ ਹੈ ਜੀ ਇੱਕ ਤਾਂ ਸੇਸ ਸਭਾਈ ਜਿ ਇਸ ਤਰ੍ਹਾਂ ਦੀ ਹੋਈ ਪ੍ਰਕਿਰਿਆ ਸਾਰੀ ਚ ਇਹ ਜਾਈ ਇਹ ਜਾਈ ਕੋਸ਼ ਹੈ ਸਾਰੀ ਸ੍ਰਿਸ਼ਟੀ ਚ ਇਹ ਨਹੀਂ ਕੋਈ ਆਦਮੀ ਵਿੱਚ ਹੈ ਅੱਛਾ ਜੀ ਸਾਰਿਆਂ ਦੀ ਕਿਤੇ ਵਿੱਚ ਹਾਂ ਹਾਂ ਪਰ ਟੋਲਣ ਦੇ ਵਾਸਤੇ ਹਾਂ ਜੀ ਟੋਲਣ ਅੱਧਾ ਟੋਲਣ ਹਾਂ ਹਾਂ ਅੰਤ ਟੋਲਣ ਦਾ ਦੂਰ ਹੈ ਅੱਛਾ ਇੱਕ ਕੌਸ਼ਤ ਸਵਾਈ ਇੱਕਮਕਾਰ ਅਵਲਵੀ ਦੂਜਾ ਇੱਕ ਕਾਰਾ ਸਭ ਦੇ ਵਿੱਚ ਹਾਂ ਆਯਾ ਔਂਕਾਰ ਨਹੀਂ ਆਇਆ ਹੁਣ ਫੇਰ ਹਾਂਜੀ ਤੋ ਇੱਕਮਕਾਰ ਆ ਗਿਆ ਦੂਜਾ ਦੂਜਾ ਕੋਈ ਨਹੀਂ ਇਹ ਤਾਂ ਨੇ ਠੀਕ ਹੈ ਜੀ ਅਕਾਰ ਰਹਤ ਨੂੰ ਭਾਇਤ ਉਹ ਰਹਤ ਨੂੰ ਇਹ ਅਕਾਰ ਆਤਮਾ ਰਹਤ ਸਰੀਰ ਹੁੰਦਾ ਹੈ ਅੱਛਾ ਜੀ ਗਾਨ ਤੇ ਇੱਕ ਸਭਾਈ ਆਪਣੇ ਆਪ ਦੇ ਸਬੂਦ ਆਪਣੇ ਆਪ ਨਾਲ ਸਮਾਧੀ ਘੁੰਮਣ ਅੱਛਾ ਜੀ ਇਹ ਏਕਾਂਕਾਰ ਤੋਂ ਭਾਵ ਪ੍ਰਭਈ ਹੈ ਜੀ एकंकार पूर्ण ब्रह्म अच्छा जी पूर्ण ब्रह्म दनूर आचार्य जी मूल ब्रह्म एकदम काले जे आपा कहिए एकंकार कही एक अंकार और एक और ओंकार दा की फर्क है आपस उ काल हुकम रूप है अच्छा जी एक एकं का हुकम दे बिच है एकंकार हु ਜੋ ਓਮਕਾਰ ਹਾਕਮ ਹੈ ਜੀ ਇਹ ਦਾਸ ਹੈ ਇਹ ਦਾਸ ਹੈ ਈ ਕੰਕਰ ਕੋ ਸਾਹਿਬ ਹੈ ਅੱਛਾ ਜੀ ਇਹ ਕੰਕਰ ਦਾਸ ਹੈ ਜਿਹੜਾ ਸਾਹਿਬ ਹੈ ਅਜਾ ਇਨੇ ਉਸ ਪਾਰਲੀਮੈਂਟ ਦੇ ਵਿੱਚ ਸਮਾਉਣਾ ਜਾ ਕੇ ਜਾਂ ਪਾਰਲੀਮੈਂਟ ਬਣ ਗਿਆ ਫਿਰ ਉਹ ਜਾਈ ਬਣ ਕੇ ਜਾ ਦੇ ਠੀਕ ਹੈ ਜੇ ਤੂੰ ਕਾਰੇ ਬਣ ਗਿਆ